ਕਿਹੜਾ ਗਿਆ ਹੈਗਾ ਮਾਨ ਹੈ ਮਾਨ ਆਪਣੀ ਵਿਰੋਧੀ ਹੈ ਅੱਛਾ ਕਰਦਾ ਨਾ ਹੈ ਹੂੰ ਕਰਦਾ ਕੋਈ ਬੋਲ ਰਹੀ ਹੈ ਬੈਠਾ ਅੰਦਰ ਸਾਚ ਨਾਲੇ ਸਾਚ ਦਾ ਗਰੋਹੀ ਬਣ ਖੜਾ ਹੈ ਅੱਛਾ ਸਰਕਾਰ 'ਤੇ ਦਲਣਾ ਐਸੀ ਇਹ ਤੇ ਜਿਹਦਾ ਕੋਈ ਬਤਲੂ ਹੋਵੇ ਸੁਖ ਰੀਤੀ ਖਲਦੀ ਹੈ ਨਾ ਸੁਖ ਦੇ ਵਿੱਚ ਵਿਰੋਧ ਕੀਤਾ ਸੀ ਜਿੱਤ ਦਾ। ਅੱਛਾ ਦਾ ਵਿਰੋਧ ਕੀਤਾ ਸੀ ਤਾਂ ਆ ਕੁਝ ਹੋ ਗਿਆ ਸੀ। ਹੂੰ ਹੂੰ। ਸਾਡੇ ਨਾਲ ਵਿਰੋਧ ਹਲਦੀ ਕਰਨਾ ਨਹੀਂ ਜੀ। ਆਪਣੇ ਜਿੱਤ ਦਾ ਵਿਰੋਧ ਹਲਦੀ ਕਰਨਾ ਛੱਡ ਦੇਣਾ। ਕਰਤਾਰ ਦਰਸਕ ਕਿਰਤ ਨੂੰ ਕਰਦੀ ਹੈ ਉਹ ਐਸੀ ਕਰਤ ਕਰਦੀ ਜਿਹਦਾ ਕੋਈ ਮਤਲਬ ਹੋਵੇ ਆਸਰ ਹੋਵੇ ਜਾਂ ਕੋਈ ਕੀ ਤਾਂ ਕੋਈ ਪ੍ਰਾਪਤੀ ਹੋਵੇ ਹੂੰ ਐਸੀ ਕਰਤ ਨਹੀਂ ਕਰਦੀ ਜਿਸ ਦਾ ਕੋਈ ਹੋਵੇ ਐਸੀ ਜੋਜ ਤਾਂ ਹਲੂ ਜਿਹੜੀ ਲਾਭਦਾਇਕ ਹੋਵੇ ਲਾਭ ਹੋਵੇ ਜਿਹੜਾ ਜੋ ਕੰਮ ਆਇਆ ਉਹ ਕੰਮ ਹੋਵੇ ਕੀ ਗਿਆਨ ਪ੍ਰਾਪਤ ਹੋਵੇ ਆਤਮ ਗਿਆਨ ਪ੍ਰਾਪਤ ਹੋਵੇ লাভ ਹੋਵੇ ਜਿਹੜੀ ਕਰਤ ਐਸੀ ਕਰਦੀ ਹੈ ਜਿਹੜਾ ਉਹ ਤਾਂ ਪੈਦਾ ਹੋਵੇ ਜੋ ਚੀਜ਼ ਸਾਡੇ ਨਾਲ ਜਾਵੇ ਹੂੰ ਹੂੰ ਆਪਸ ਦੀ ਖਮੋਈ ਕਰਨ ਲਈ ਤੁਹਾਨੂੰ ਤਾਂ ਇਹ ਚਰਚਾ ਦਾ ਗੱਲ ਪਰ ਜਿਹੜਾ ਕੰਸਖਰ ਹੈ ਇਹ ਹਿੰਦੂਆਂ ਦੇ ਉਹਦੇ ਵਿੱਚ ਤਾਂ ਕੰਸ ਨੂੰ ਇੱਕ ਮਾੜਾ ਮੰਨਿਆ ਜਾਂਦਾ ਆਪਾਂ ਕੰਸ ਦਾ ਅਰਥ ਕੀ ਕਰਾਂਗੇ ਇਹ ਬੜਾ ਹਾਂ ਕਾਦੂਦ ਹੋਦੀ ਹੈ ਇਹਦਾ ਦੋਦਾ ਦੋਲ ਬੋਦੀ ਕਾਦੂਦ ਹੋ ਰਹੀ ਹੈ ਕ੍ਰਿਸ਼ਨ ਨੇ ਮਾਰਦਾ ਦਿਖਾਇਆ ਕੰਸ ਕਰੋ ਖਟੋਈ ਨੂੰ ਦਾਵਲ ਨੇ ਬਦਲ ਕੀ ਦਿਖਾਇਆ ਉਹਨਾਂ ਨੇ ਉਹਨਾਂ ਨੇ ਹੁਲਦੇ ਦਾ ਕੋਲ ਹੋ ਸੀ ਹੂੰ ਹੂੰ ਰੁਕ ਗਿਆ ਦੂ ਹੂੰ ਹੂੰ ਤੁਹਾਡੇ ਜਿਹੜੇ ਸੇ ਹੂੰ ਹੂੰ ਮਾਨਿਕਾ ਵੀ ਕੰਮਾ ਦੇ ਸਰ ਇਹੋ ਦੂ ਹਾਂਜੀ ਕਨਸਰ ਉਹਦੀ ਕੋ ਬੈਰ ਬੈਲੀ ਮਾਉਦੇ ਤੇ ਕਦੇ ਚੱਤਰੀ ਚੱਤਰੀ ਬਹੁਤ ਬੰਦੇ ਆਤੋ ਦੀ ਹੋੜੀ ਹਮ ਹਮ ਕਦੇ ਕੋਈ ਸੰਤੁਲਨ ਦੀ ਬੰਦ ਹਮ ਹਮ ਜਿਵੇਂ ਤੁਸੀਂ ਜਰਨਲizada ਕਿਹਨਾਂ ਬੋਲਦੇ ਹਮ ਹਮ ਕੋਈ ਤੇ ਹਮ ਉਹ ਬਦਲ ਹੀ ਚੱਲਦਾ ਹਮ ਹਮ ਕਰਿਆ ਜੀ ਬਹੀ ਕਰਿਆ ਉਹਨਾਂ ਦਾ ਕੋ ਪਾਪ ਦੀ ਗੱਲ ਲਖਾਈ ਇਸੋਲ ਪੜਾਗ ਮੀ ਜੀ ਉਹ ਕਹਿਹਿੰਦੇ ਮਾਰਤਾ ਜੀ ਕੋਈ ਨੂੰ ਉਤਾਰ ਦਿਖਾਉਣ ਦਾ ਅਸਲ ਦੇ ਵਿੱਚ ਕਿਸ ਨੂੰ ਉਤਾਰ ਦਿਖਾਉਣ ਦਾ ਉਹਨਾਂ ਨੇ ਹੂੰ ਹੂੰ ਕਿ ਤਰੀਕੇ ਨਾਲ ਦਿਖਾਇਆ ਕੀ ਕੀਤਾ ਕੀ ਨਹੀਂ ਕੀਤਾ ਹੂੰ ਦਿਖਾਤੀ ਹੂੰ ਇਸ ਕੀਤੇ ਤੋਂ ਠੀਕ ਹੈ ਜੀ ਤਾਂ ਇਹ ਜਦੋਂ ਆਪਾਂ ਉਗਰ ਸੈਨ ਕੋ ਰਾਜ ਬਹਿ ਭਗਤ ਜਨ ਦਿਓ ਇਹਦੇ ਵਿੱਚ ਇਹ ਗੱਲ ਜ਼ਿਆਦਾ ਸਾਫ ਹੋ ਜੂਗੀ ਹਾਂ ਜੀ ਉਗਰ ਸੈਨ ਦਾ ਰੋਂਦਲਾ ਹਾਂ ਜੀ ਉਗਰ ਨੂੰ ਪੁਨਰਾਜ ਦੇਣਾ ਹਾਂ ਜੀ ਰਾਜ ਉਗਰ ਨੂੰ ਫਿਰ ਹੋਈ ਹੈ ਹੂੰ ਹੂੰ ਭਗਤ ਜਨ ਦਿਓ ਜੋਰਦਾ ਹੋਈ ਆ ਉਹ ਵਿਚਾਇਆ ਹੋ ਗਿਆ ਸੀ ਜਿਹੜਾ ਉਹ ਪ੍ਰੋਫੈਸਰ ਨੇ ਹਰ ਕਾਲ ਨੂੰ ਹੂੰ ਹੂੰ ਆਮੇ ਵੀ ਮਾਨੰਬਰ ਜਦੋਂ ਕਹਿਣਗੇ ਜਤੁਰ ਹੀ ਹੈ ਜੇ ਉਹਦਾ ਮਨ ਬੁਰੀ ਅੰਦ ਕੋਈ ਅਟਾ ਉਹ ਵਿਰੋਧੀ ਹੋ ਜਾਂਦੇ ਫਿਰ ਜਿਆਦਾ ਸੀ ਆਪਣੇ ਗੁਰਮਤ ਦੇ ਵਿਰੋਧੀ ਹੋ ਜਾਂਦੇ ਹੂੰ ਫਿਰ ਜੋ ਜੁਗ ਲਾ ਜਾਂਦੇ ਆ ਹਾਂ ਆਪਣੇ ਹੋਂਦ ਦਾ ਆਪਰੋਪ ਕਰਦੇ ਜੀ ਆ ਤੇ ਗ੍ਰੋਹ ਦਾ ਜਨ ਐਤਾ ਬਿਲਕੁਲ ਸਹੀ ਬੋਲ ਕਾਂਸ ਨੂੰ ਫਿਰ ਆਪਾਂ ਚਿੱਤ ਕਹਾਂਗੇ ਤੇ ਹਾਂ ਕਾਂਸੇ ਚਿੱਤਰ ਨਾ ਹੋਏ ਫਿਰ ਕਾਂਸ ਕਰਤਾਰਥ ਹੈ ਜਰ ਪਰ ਦੋਸਤ ਉਹਨੇ ਕਹਿੰਦਾ ਕਿ ਮਾਨਕ ਚਿੱਤੇ ਹੂੰ ਕੱਲਾ ਨਹੀਂ ਮਾਰਦਾ ਕੱਲਾ ਬੰਦ ਜਿਹੜੀ ਕਿਰਤ ਕੰਦਾ ਉਲਟੀ ਕਰਦਾ ਹੈ ਅੱਛਾ ਪਰ ਕਾਂਸੇ ਕਿਰਤ ਜੀ ਫਿਰ ਕੌਣ ਹੈ ਮਾਨਕ ਚਿੱਤੇ ਅੱਛਾ ਜੀ ਚਿੱਤਾ ਇਹ ਤਾਂ ਜਦੋਂ ਸਰ ਗੁਰੀ ਨਾ ਅੱਛਾ ਜੀ ਦਰਤਾਰ ਕੋਥੇ ਦਾ ਹੁਣ ਠੀਕ ਹੈ ਜੀ ਹਾਂਜੀ ਉਗਰ ਸੈਨ ਕੋ ਰਾਜ ਹੈ ਉਗਰ ਸੈਨ ਕੋ ਰਾਜ ਅਬੇ ਭਗਤੇ ਜਨ ਦੀਓ ਹッਪੇ ਫਗਤਾ ਹੈ ਜਾਣ ਦਿਓ ਹਾਂ ਪੀਓ ਉਹ ਵਕਤ ਰਾਜ ਦੇਤਾ ਅਪਹੇ ਦਾ ਦੇਤਾ ਅਪਹੇ ਹਮਮ ਹਮ ਮਨ ਵਿੱਚ ਜਿਹੜਾ ਪੈਸੇ ਇਹਦਾ ਪੈਸਾ ਦੂਰ ਹੋ ਮਹਾਵਦੀ ਪ੍ਰਾਪਤੀ ਹੋ ਗਈ ਠੀਕ ਹੈ ਤੁਹਾਨੂੰ ਜਾਣਕਾਰੀ ਹੋਣੀ ਕਿ ਹੂੰ ਹੂੰ ਕਿ ਤੁਹਾ ਪਰਮਾਤਮਾ ਸੋ ਗਿਆ ਠੀਕ ਹੈ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਉਹ ਜੇ ਕਹਤੋਂ ਕਿ ਕਹਿੰਦੇ ਹਾਂਜੀ ਆਪਾਂ ਭਗਤਾ ਹਾਂ ਜੀ ਬੀਓ ਹੂੰ ਹੂੰ ਕਿਸੇ ਨੂੰ ਕੱਲ੍ਹ ਕਿਤੇ ਮੈਂ ਆਵੇਂ ਭੈਰ ਨੂੰ ਵੀ ਤਾਂ ਅੰਦਰ ਅਹਰ ਆਇਓ ਇਹ ਜਿਹੜੇ ਸੱਜੇ ਆਓ ਰਿਆ ਬਲੂ ਵੀਰ ਆਪਣੇ ਘਰ ਨੂੰ ਕੋਨੇ ਨਾਲ ਹੀ ਲਿਆ ਹੋਰਾਂ ਦੱਸ ਕੇ 100 ਲਿਆ ਵੀ ਵੀ ਲਿਆ ਹੋਇਆ ਹੂੰ ਹੂੰ ਕਹਿੰਦਾ ਭਰੂ ਗਾਂਧੀ ਕੀ ਘਾਟ ਪਰੂ ਗਾਂਧੀ ਜਾਣਾ ਹੂੰ ਹੂੰ ਅਸੀਂ ਕੀ ਘਾਟ ਪਰੂ ਗਾਂਧੀ ਜਾਣਾ ਹਾਂ ਹੂੰ ਹੂੰ ਹੈ ਇਹ ਉਹ ਨੂੰ ਉਦਾਂ ਤੋਂ ਨਹੀਂ ਜਾਂਦਾ ਉਹ ਹੋਇਆ ਇਹ ਜਾਣਿਆ ਉਹ ਤੇ ਸੀ ਜੀ ਹਾਂ ਇਹ ਜਾਣ ਲਿਆ ਉਹਦੇ ਵਰਗਾ ਹੀ ਦਾ ਨਾਮ ਲਗਦਾ ਠੀਕ ਹੈ ਜੀ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ ਜਿਹੜੇ ਗੁਰੂ ਦਾ ਰਾਜ ਜਿਹੜਾ ਹੂੰ ਤੋਂ ਵੱਡੇ ਗੁਰੂ ਦਾ ਰਾਜ ਹੈ ਜਿਹੜਾ ਹੂੰ ਗੁਰੂ ਦਾ ਰਾਜ ਹੈ ਜਿਹੜਾ ਹੂੰ ਅਵਚਲ ਚ ਹਮ ਹਮ ਆਵਤੈਲਾ ਆਵਤੈਲਾ ਮੈਂ ਨਹੀਂ ਹੈ ਜੋ ਫਿਰ ਰਾਜ ਆ ਕਰੇ ਕੋਈ ਰਾਜਾ ਸਨ ਕੋਈ ਰਾਜਾ ਸਨ ਕੋਈ ਰਾਜਾ ਸਨ ਕੋਈ ਰਾਜਾ ਉਹ ਫਿਰ ਰਾਜ ਬਗਲ ਦਾ ਹਮ ਹਮ ਕੋਈ ਆਬ ਠੀਕ ਹੈ ਜੀ ਉਹ ਰਾਜ ਕੋਈ ਹੀ ਰਹਿ ਆਦਪੁਰਖ ਨੇ ਇਹ ਗੱਲ ਦੱਸੀ ਹੈ ਮੈਨੂੰ ਮੈਂ ਤਾਂ ਕਹਿ ਰਿਹਾ ਹਾਂ ਹਮ ਹਮ ਦੱਸੀ ਹੋਈ ਗੱਲ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਆਪਣੀ ਕੋਈ ਕੁਛ ਨਹੀਂ ਅੱਛਾ ਕੀ ਦੇ ਵਿੱਚ ਰਾਜ ਅਭੀਕਾ ਕਰ ਰਿਹਾ ਹੈ ਹਮ ਜਿਹੜਾ ਆਦ ਕਾਲ ਤੋਂ ਪੁਰਖ ਹੈ ਉਹ ਨੇ ਦੱਸੀ ਪਰਮੇਸ਼ਰ ਨੇ ਹਾਂ ਹੋਈ ਗੱਲ ਮੈਂ ਕਹਿ ਰਿਹਾ अच्छा अभी मैं बुलाया बोल रहे हैं जी बुलाया बोल रहे हैं ठीक है जी हां जी उन्होंने मेनू ये कह है कि अफजल वो कभी उनका कोई सबूत है और ये कह ता बेशाय और ਤੁਸੀਂ ਆਪ ਪੁੱਛ ਲਿਓ ठीक है जी हां मैं कोई जवाब दे नहीं ये गलਦਾ ਹੈਗਾ कहता जो ਯਾਦਪੁਰਖ ਹੋਇਆ ਮੈਂ ਤਾਂ ਹਾਲਪੁਰਖ ਪਰਮੇਸ਼ਰ ਵਾਸਤੇ ਗਿਆ ਹਾਂ ਜੀ ਬਿਲਕੁਲ ਬਿਲਕੁਲ ਜੋ ਤੁਰਕੀ ਵਾਲੀ ਆਈ ਹੈ ਹੂੰ ਵੀ ਵਰਤ ਸਕਦੇ ਹਾਂ ਆਦਪੁਰਖ ਵਰਤ ਲੋ ਲੋ ਗੱਲ ਹੈ ਜੀ ਪੋਹਲਾ ਹਾਲਪੁਰਖ ਆਗਾਪ ਠੀਕ ਹੈ ਜੀ ਹਾਲ ਤੋਂ हां जी गुण गावे रविदास भगत जयदेव त्रिलोचन नामा भगत कबीर सदा गावे समलोचन और ये पहले भगत ने गुरु नानक तो अच्छा जी तो पहला शुरू कर लियो तो गल गुण गावे हम्म हम्म तेरे गुरु दाएरे उन्होंने भी गाए ਬੁਲਗਾਵਾਂ ਲੋਕਾਸ ਭਗਤ ਜੈ ਦੇਵ ਤੇ ਲੋਚਨ ਤੇ ਲੋਚਨ ਜੈ ਦੇਵ ਤੇ ਲੋਚਨ ਨੇ ਇਹਾਂ ਦੇ ਕੋਲ ਘਾਇ ਨੇ ਤੇਰੇ ਠੀਕ ਐਈ ਗੋਲ ਚ ਨਾਨਕ ਨੇ ਘਾਇ ਲਏ ਨੇ ਰੋਣੇ ਘਾਇ ਲਏ ਕੋਈ ਗੱਲ ਨਾ ਬਾਣੀ ਕੱਟੀ ਤਾਹੀ ਕਰਤੀ ਭਗਤ ਸਦਾ ਗਾਵੇ ਸੰलोਚਨ ਪਤਾ ਲੱਗ ਕੋਈ ਲੈਵਲ ਐ ਬਾਣੀ ਦਾ ਸਾਰੀ ਦਾ ਕਾਇਤ ਕਿਛੋ ਕੋਈ ਭਗਤਾਂ ਦੀ ਬਾਣੀ ਨੂੰ ਕਟਿਆ ਨੂੰ ਛੇਦਵੇ ਹੂੰ ਹੂੰ ਯਾ ਵਧੀਆ ਨਾ ਛੇਦਵੇ ਗੁਰੂ ਨਾਨਕੀ ਬਾਣੀ ਨੂੰ ਕਟਿਆ ਨਾ ਛੇਦਵੇ ਇਹ ਸਬਈਆ ਵਿੱਚ ਰੱਖ ਦਿੱਤਾ ਹੂੰ ਹੂੰ ਦੀ ਬਾਣੀ ਨੂੰ ਕਟਿਆ ਨਾ ਛੇਦਵੇ ਪਟਾ ਤੋਂ ਸਭਾ ਕੋਲ ਆਉਂਦੀ ਉਹਨਾਂ ਨੇ ਵੀ ਗੋੜਾਇ ਨਹੀਂ ਵੀ ਗੋੜਾਇ ਨਹੀਂ ਆ ਭਟ ਗਿਆ ਵਧੀਆ ਗਾਇਕ ਆਲੇ ਤਾਂ ਬਹੁਤ ਗੋਦਦੇ ਨੇ ਉਹ ਉਹਨਾਂ ਨੇ ਘਟੇ ਦੇਖਣ ਹੁੰਦਾ ਵੀ ਬਾਣੀ ਉਹਨਾਂ ਨੇ ਕੀ ਤਾਂ ਬਾਣੀ ਤਾਂ ਲੈਣਾ ਕੀ ਉਹਨਾਂ ਨੇ ਸਮਝ ਕੇ ਲੈ ਉਹਦਾ ਇਹ ਗਾਣਾ ਵੀ ਨਾਨਕ ਤੇ ਪੰਜਾਬ ਦਾ ਹੈ ਉਹ ਉੱਥੇ ਦਾ ਉਹ ਉੱਥੇ ਦਾ ਇਸ ਘਰ ਕੇ ਜੀਉਂਦੀ ਆ ਗਾਉਂਦੀ ਲਓ ਜੀ ਉਹਦਾ ਵਾਪਰਣਾ ਜੀ ਉਹ ਕਹਿੰਦੇ ਉਹ ਤਾਂ ਜੀ ਉਹ ਸਿੱਖਾ ਜੀ ਉਹ ਤਾਂ ਜੀ ਖਤਰੀ ਹੈ ਉਹ ਤਾਂ ਜੀ ਭੁਲੰਦ ਉਹ ਜੀ ਜਮਾਰ ਹੈ ਅਸੀਂ ਕਹਿੰਦੇ ਉਹਦੀ ਗੱਲ ਬੰਨੇ ਕਿਸੇ ਦੀ ਨਹੀਂ ਹੈ ਕਿਨਾ ਇਹ ਬਦਵਾ ਨੀ ਲੈਵਲ ਦੀ ਸੁਣਾਈ ਠੀਕ ਹੈ ਹਾਂ ਜੀ ਗੁਣ ਗਾਇ ਹਾਂ ਵਿਦਵਾਨ ਪੰਜ ਭਗਤਾਂ ਦੇ ਨਾਮ ਹੈ ਜੀ ਇੱਥੇ ਹਾਂ ਜੀ ਰਵਦਾਸ ਭਗਤ ਜੈਦੇਵ ਤੁਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸੰਮਲੋਚਨ ਨਾਮਾ ਨਾਦੇ ਹੋਇਆ ਹਾਂ ਕਬੀਰ ਹੋਇਆ ਹਾਂ ਪੰਜ ਨਾਮਾ ਭਗਤ ਕਬੀਰ ਸਦਾ ਗਾਵਾਂ ਹਾਂ ਜਦੋਂ ਮੈਂ ਬੋਲਦਾ ਚਲਾਨ ਦ੍ਰਿਸ਼ਟੀ ਇੱਕੋ ਜੀ ਦ੍ਰਿਸ਼ਟੀ ਹੈ ਉਹਨਾਂ ਦੀ ਉਹ ਚਾਰ ਵਣ ਨਹੀਂ ਬੰਦੇ ਸਭ ਲੋਚਨ ਹੈ ਹੋ ਹਮ ਹਮ ਕੁਝ ਕੀਤੀ ਕਿਸੇ ਦੀ ਪੁਜਾਈ ਉਸਤ ਨਹੀਂ ਕੀਤੀ ਨਾ ਕਿਸੇ ਦੀ ਦੁਦਿਆ ਕੀਤੀ ਨਾ ਕਿਸੇ ਉਸਤ ਨਹੀਂ ਕੀਤੀ ਉਸਤ ਨੰਦਾ ਦਉ ਬਵਰਜਤ ਨਾ ਉਸਤ ਕੀਤੀ ਹੈ ਕਿਸੇ ਦੀ ਨੰਦਿਆ ਕੀਤੀ ਜੋ ਸੱਚੀ ਕਹਿਤਾ ਕੱਟ ਕਰਨ ਵਾਸਤੇ ਸਭ ਲੋ ਚਲੋ ਸਭ ਦ੍ਰਿਸ਼ੇ ਤੋ ਠੀਕ ਹੈ ਜੀ ਭਗਤ ਵੇਣ ਗੁਣ ਰਵੈ ਸਹਿਜ ਆਤਮ ਰੰਗਮਾਨ ਹੈ ਭਗਤ ਵੇੜੀ ਵਰਤੈ ਉਹ ਗੁਣ ਸਹਿਜ ਆਤਮ ਰੰਗਮਾਨ ਹੈ ਕੇ ਹੂੰ ਹੂੰ ਉਹ ਹੋ ਗਿਆ ਤਾਂ ਟੇਕਿਆ ਮਾ ਟੇਕਿਆ ਉਹਦਾ ਹਮ ਆਤਮਾਨ ਰੂਪਾਨ ਹੈ ਹਮ ਜੈਸਰ ਰੂਪਾਨ ਹਮ ਮਨ ਰੂਪ ਆਪਣੇ ਨਾਲ ਵਿੱਚ ਰਹਿ ਗਿਆ ਉਹ ਆਪਣੇ ਨਾਲ ਵਿੱਚ ਬਸ ਰਹਿਦਾ ਹਮ ਆਪਣੇ ਆਪ ਨਾਲ ਹੀ ਜੁੜਿਆ ਰਹਿੰਦਾ ਹੈ ਠੀਕ ਹੈ ਹਾਂਜੀ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣ ਹੈ ਹੁਣ ਕੰਮ ਕੀ ਹੈ ਯੋਗ ਕੀ ਹੈ ज्ञान योग है हम्म ज्ञान योग है जोग ध्यान हम्म दूर ज्ञान ज्ञान ਤੇ ਦੁਰਨਾ ਤੇ ਆਨ ਵਿੱਚ ਹੀ ਸਭ ਕੁਝ ਲੱਭਣਾ ਧਿਆਨ ਵਿੱਚ ਧਿਆਨ ਯਾ ਕੋਰ ਗਿਆਨੁਰਮਤ ਦਾ ਗਿਆਨ ਇਹਦੇ ਵਿੱਚ ਧਿਆਨ ਦੇਣਾ ਹੂੰ ਦਾ ਗਿਆਨ ਹਾਸਲ ਕਰਨਾ আর ਇਹਦੇ ਨਾਲ ਬੰਦ ਟਿਕ ਜਾਣਾ ਇਹਦੇ ਪਹਿਲਾਂ ਹੋਰ ਕੋਈ ਪ੍ਰਾਪਰਟੀ ਹੈ ਉਹਦੇ ਬਾਅਦ ਇਹ ਨਹੀਂ ਵਰਣੀਣਾ ਬੋਲਦਾ ਟਿਕ ਜਾਣਾ ਇਹ ਤੋਂ ਵੱਡੀ ਚੀਜ਼ ਕੋਈ ਨਹੀਂ ਉਹਦੇ ਵਾਸਤੇ ਹਮ ਹਮ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨੂੰ ਜਾਣ ਹੋਰ ਕੋਈ ਪ੍ਰਾਪਤੀ ਹੁੰਦਾ ਹੈ ਹਮ ਹਮ ਤੇ ਸਭ ਗਿਆਨ ਲੈ ਲੈਣਾ ਮਨ ਨੂੰ ਟਿਕਾ ਲੈਣਾ ਹਮ ਵੱਡਾ ਉਸ ਗਿਆਨ ਤੋਂ ਵੱਡੀ ਕੋਈ ਚੀਜ਼ ਨਹੀਂ ਹਮ ਠੀਕ ਹੈ ਜੀ ਜਿਹੜਾ ਬੋਲ ਟੈਕ ਹੈ ਉਹਨੇ ਵਾਤੇ ਧਿਆਨ ਹੈ ਉਹ ਤੋਂ ਵੱਡੀ ਚੀਜ਼ ਹੈ ਜਿਹੜੀ ਜਿਹੜੀ ਤੇਰਾ ਮਨ ਤੇਰਾ ਰੋਗ ਹੈ ਉਹ ਦਵਾਈ ਤੋਂ ਵੱਡੀ ਕੋਈ ਚੀਜ਼ ਨਹੀਂ ਸਾਡੇ ਵਾਸਤੇ ਸਰਪਾਰਚ ਖੰਭਾਉ ਠੀਕ ਤਾਂ ਹੋਰ ਕੋਈ ਜੀ ਹੂੰ ਹੂੰ ਠੀਕ ਹੈ ਜੀ ਦਵਾਈ ਆਈ ਕਿ ਤੋ ਦਵਾਈ ਸੱਚ ਨਾਲ ਦਵਾਈ ਹੋ ਗਿਆ ਨਾ ਹੂੰ ਤਾਂ ਸਾਹਤ ਤੋਂ ਵੱਡੀ ਕੋਈ ਚੀਜ਼ ਨਹੀਂ ਸਾਡੇ ਵਾਸਤੇ ਪਰ ਵਾਤੇ ਜਾਣ ਤੋਂ ਵੱਡੀ ਕੋਈ ਚੀਜ਼ ਨਹੀਂ ਤਾਂ ਕੀਮਤੀ ਸਾਡੇ ਵਾਸਤੇ ਕੁਛ ਨਹੀਂ ਹੈ ਜੀੋ ਸਬਤੋ ਜੀ ਜੇ ਡੀਸੀ ਗੁਰੂ ਜੀ ਹਮ ਹਮ ਉਹ ਤਾਂ ਨੇ ਉਹ ਗੁਰਬਾਨੀ ਦੇਤੀ ਜਾਨੂੰ ਹਮ ਹਮ ਅਸੀਂ ਉਹਨਾਂ ਦੀਆਂ ਫੋਟੋਆਂ ਨਾਲ ਚੱਕੀ ਆ ਜਿਹੜਾ ਦਿੱਤਾ ਹੋਇਆ ਸਭ ਕੋ ਦਿੱਤਾ ਉਹਨਾਂ ਨੇ ਆਪਣਾ ਢੇਲ ਖੋਲ ਕੇ ਦਿੱਤਾ ਤੁਹਾਨੂੰ ਗੁਰਬਾਨੀ ਕਿ ਉਹ ਢੇਲ ਉਹਨਾਂ ਦਾ ਗੁਰਬਾਨੀ ਹੈ ਹਮ ਖੋਲ ਕੇ ਰੱਖਿਆ ਪਿਆ ਤੇ ਲੈ ਲਓ ਉਹਨੂੰ